ਦੱਖਣੇ ਮਹੱਲਾ ਪੰਜਵਾਂ ਜਾਮੂ ਆਵੇਂ ਚਿੱਤ ਤੂੰ ਕਾ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਤੇਰੀ ਤਹੰਜਾ ਨਾਮ ਜਾਮੂ ਆਵਾਹ ਕਿਤ ਜਤੂ ਬਲੇ ਸੁਖ ਪ੍ਰਾਪਤ ਹੁੰਦੇ ਨੇ ਮੈਨੂੰ ਮੇਰੇ ਕੋਲ ਸਾਰੇ ਸੁਖੇ ਸੁਖ ਹੁੰਦੇ ਨੇ ਲੋਕ ਕੋਈ ਵੀ ਨਹੀਂ ਹੁੰਦਾ ਲੈ ਜੀ ਲਹਾਉ ਤੋ ਲਾਹ ਲੈਣਾ ਪ੍ਰਾਪਤ ਕਰਨਾ ਆ ਜਾਂਦਾ ਨੇ ਸੁਖ ਲਾਹ ਲੈਣਾ ਨਾਨਕ ਮਨ ਹੀ ਮਨ ਹੀ ਪੰਜ ਰਹਾਵਲਾ ਆਣ ਕਹਿਣਾ ਅੰਦਰੇ ਰੰਗ ਜੜੀ ਨਹੀਂ ਆਂਦਾ ਮਨ ਨਾਮ ਦੇ ਰੰਗ ਜੜ ਅੰਦਰੇ ਮਨ ਨੂੰ ਨਹੀਂ ਜਾਇਦਾ ਓਦੋਂ ਤਰੀ ਤਹਿੰਜਾ ਨਾਮ ਤਰੀ ਫੇਰ ਪਰਦਾ ਹੀ ਹੋ ਜਾਂਦਾ ਹੈ ਦੂਬਲੀ ਤੇਰਾ ਗਿਆਨ ਅਰ ਫੇਰ ਦਾ ਗਿਆਨ ਫੇਰਾ ਤੂੰ ਹੀ ਕੋ ਹੋ ਜਾਂਦੇ ਫੇ ਤੂੰ ਵੀ ਫੇਰੇ ਬਣ ਜਾਂਦੇ ਇੱਕ ਹੋ ਜਾਂਦਾ ਫਿਰ ਇੱਕੋ ਰਹਿ ਗਿਆ ਫੇ ਬਾਲਟੀ ਚ ਪਾਣੀ ਦਾ ਗਲਾਸ ਪਾਤਾ ਫੇਰ ਉਹ ਦੁੱਧੇ ਹੋ ਗਿਆ ਉਹਨੂੰ ਉਹਨਾਂ ਜਿਹੜੇ ਪਾਣੀ ਦਾ ਜਿਹਨਾਂ ਜਰ ਬਾਹਰ ਸੀ ਅਲੱਗ ਤੇ ਤਾਂ ਪੈ ਗਿਆ ਅੰਦਰ ਪਾ ਹੋ ਗਿਆ ਸਾਰਾ ਹੀ ਸਾਰੇ ਦਾ ਸੁੱਧਾ ਸਾਰੇ ਦਾ ਰੰਗ ਹੀ ਪੈ ਰਿਹਾ ਠੀਕ ਹੈ ਜੀ ਮਨ ਹੀ ਮੰਜ ਰੰਗਾਵਲਾ ਮੇਰੇ ਮਨ ਨੂੰ ਰੰਗ ਚੜ ਗਿਆ ਯਾਰ ਰੰਗ ਚੜ ਗਿਆ ਉਹਦੇ ਵਿੱਚ ਆ ਕੇ ਰੰਗ ਚੜ ਗਿਆ ਦੁੱਧ ਹੋ ਗਿਆ ਉਹ ਤਰੀ ਤਹੰਜ ਤੇਰੇ ਗਿਆਨ ਨਾਲ ਹੈ ਜੀ ਬੁੱਧੀ ਹੈ ਪਤੀ ਤਾਂ ਤੂੰ ਵੀ ਪਤੀ ਹੋਈ ਹੈ ਅੱਛਾ ਜੀ ਤੇਰਾ ਹੀ ਨਾ ਹੈ ਤਾਂ ਮੈਨੂੰ ਰੰਗ ਚੜਿਆ ਤੇਰੇ ਵਾਲਾ ਹੈ ਤੂੰ ਹਣ ਪਤੀ ਹੋਈ ਹੈ ਠੀਕ ਹੈ ਜਿਹੜਾ ਮਨ ਨੂੰ ਰੰਗ ਚਾੜ ਦੇਵੇ ਉਹੀ ਪਤੀ ਹੈ ਜੀ ਕੋਈ ਹੋਵੇ ਦੋਏ ਪਤੀ ਹੋ ਗਿਆ ਉਹ ਹੋਰ ਰਹਿ ਗਿਆ ਠੀਕ ਹੈ ਇਹ ਹੁਣ ਰੰਗ ਵਾਲੇ ਦਾ ਨਵਾਂ ਪਿਰੀ ਬਣ ਗਿਆ ਜੀ ਪਿਰੀ 53 ਨਵ ਆ ਹੋ ਗਿਆ ਰੂਪਿਕ ਹੋ ਗਿਆ ਬਖਰੀ ਲੀਦਾ ਰੰਗ ਰੂਪ ਰਿਹਾ ਕੋਈ ਬਖਰੀ ਹੋਵੇ ਬਖਰੀ ਨਹੀਂ ਰਹੀ ਠੀਕ ਹੈ ਜਿਵੇਂ ਸੱਤੇ ਬਲਵੰਡੇ ਦੀ ਬਾਤ ਚ ਜੋਤ ਉਹ ਜੁਗਤ ਸائیں ਬਸ ਬਸ ਆਪੇ ਸੇਤੀ ਮਿਕੇ ਹਾਂਜੀ ਮਹੱਲਾ ਪੰਜਵਾਂ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਛਾਰ ਹਾਕ ਲੋੜੇਂਦਾ ਖੇ ਜੋ ਰੱਤੇ ਦੀਦਾਰ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਆ ਕੱਪੜੇ ਲੈ ਲੋ ਵਧੀਆ ਤੋਂ ਵਧੀਆ ਪਾਉਂਦੇ ਨੇ ਲੋਗ ਬੜੇ ਬੜੇ ਅਮੀਰ ਆਦਮੀ ਰਾਜੇ ਬੜੇ ਬੜੇ ਇਹਲੇ ਥੇਰੀਆਂ ਦੇ ਸੰਤ ਪੰਥੀਓ ਵੀ ਬਹੁਤ ਕੀਮਤੀ ਕੱਪੜੇ ਪਾਉਂਦੇ ਨੇ ਬੜੇ ਬੜੇ ਭੋਗ ਵੀ ਕੰਦੇ ਕੰਦੇ ਪਦਾਰ ਖਾਂਦੇ ਨੇ ਇਹ ਸਭੇ ਝਾਲ ਘਵਾਏ ਸੋਰ ਹੋ ਜਾਣੀ ਹੈ ਸਭ ਦੀ ਖਾਕੁਲਣੇ ਦਾ ਤਨ ਖੇ ਜੋ ਰਤੇ دیدار ਜਿਹੜੇ دیدار ਦਾ ਉਹਦਾ دیدار ਦਾ ਰੰਤ ਚੜ ਗਿਆ ਨਾ ਜੀ ਨਾਲ ਦਰਸ਼ਨ ਹੋ ਗਿਆ ਉਹ ਖਾਕੁਲਣੇ ਦਾ ਤਨ ਖੇ ਜਿਹੜਾ ਤਨ ਖੇ ਨਾ ਸਰੀਰ ਉਹ ਤਾਂ ਇਹੇ ਵਿੱਚ ਆਇਆ ਹੁੰਦਾ ਵੀ ਜਾਂ ਜਿਹੜੀ ਖੇਦ ਵਿੱਚ ਜੇ ਮੈਂ ਗਦਾ ਲੜਦਾ ਨਾ ਆਇ ਲੜਦੇ ਵੀ ਇਹਨੂੰ ਸਮਝ ਕੇ ਰਹਿੰਦਾ ਸਰੀਰ ਜਿਹੜਾ ਸਮਝਦੇ ਖੇਦ ਇਹਦੇ ਵਿੱਚ ਲੋਟ-ਪੋਟ ਤਾਂ ਰਹਿੰਦੇ ਨੇ ਐ ਖੋਤਾ ਸਵਾ ਦੇ ਢੇਲ ਤੇ ਹੁੰਦਾ ਆਰਾਮ ਕਰਦਾ ਹੁੰਦਾ ਐ ਕਰ ਲੱਗਦਾ ਨੇ ਸਰੀਰ ਤੇ ਕਿਹ ਕਿ ਸਰੀਰ ਨੂੰ ਖਾਕ ਰੂਪੀ ਮੰਨਦੇ ਆ ਖੇਰੂ ਪਾਉਂਦੇ ਆ ਜੀ ਸਹੀ ਆ ਹੋਰ ਵੀ ਆ ਕਿਤੇ ਬੈਠ ਕੇ ਆਰਾਮ ਨਹੀਂ ਕਰ ਲੈਂਦਾ ਖੋਤਾ ਗਲੀਆਂ ਜੁਰ ਜੁਬੜੀਆਂ ਨੇ ਠੀਕ ਹੈ ਜੀ ਖਾਕ ਲੋੜੇ ਦਾ ਤਨਖੇ ਜੋ ਰੱਤੇ ਦੀਦਾਰ ਕੋਈ ਇਹਨੂੰ ਖਾਕ ਸਮਝਦੇ ਆ ਮਾਇਆ ਨੂੰ ਜੀ ਆਹ ਖਾਕ ਆ ਮਾਇਆ ਦਾ ਲੋੜ ਜਿਵੇਂ ਫੁੱਤ ਨੂੰ ਠੀਕ ਹੈ ਜੀ ਨਾਲ ਨਹੀਂ ਲੈ ਕੇ ਤੁਰਦਾ ਉੱਥੇ ਲਿਟ ਕੇ ਉੱਥੇ ਛੱਡ ਜਾਂਦਾ ਹੋਰ ਕੀਆ ਕੇ ਨਹੀਂ ਸਾਨੂੰ ਵੀ ਲੋੜ ਰਹਿੰਦੀ ਆ ਬਾਹਦੇ ਬਜੂ ਲੋੜ ਰਹਿੰਦੀ ਆ ਕੋਈ ਚੀਜ਼ ਵੀ ਲੋੜ ਤਾਂ ਰਹਿੰਦੀ ਹੋਈ ਆ ਖੇਤੀ ਜਿਉਂਦੇ ਜੀ ਇਹਨੂੰ ਖੇਤੀ ਲੋੜੇ ਆ ਵੀ ਸਾਡੇ ਨਾਲ ਤਾਂ ਫਿਰ ਉਹੀ ਸਿਆਣਾ ਹੋਇਆ ਹੈ ਜੀ ਉਹ ਘਟੋ ਘਟ ਉੱਥੇ ਹੀ ਆਪਣਾ ਖਾਦ ਤੋਂ ਫਾਇਦਾ ਲੈਣਾ ਸੀ ਲੈ ਜਾਂਦਾ ਅਸੀਂ ਖਾਦ ਨੂੰ ਨਾਲ ਚੱਕ ਕੇ ਦੁਰਪੰਨੇ ਖਰ ਬੰਦਿਆ ਨਹੀਂ ਖੋਤੇ ਨੂੰ ਤਾਂ ਖਾਲੀ ਮੰਦੀ ਬਾਣੀ ਅੱਛਾ ਜੀ ਹੋਰ ਨਾ ਧਾਨਕ ਤੇ ਨਾ ਅਸਲ ਖਾਰ ਕਹਿੰਦੇ ਅਸਲੀ ਖੋਤੇ ਤਾਂ ਉਹ ਨੇ ਜੇ ਬੇਨ ਗੋੜ ਗਰਭ ਕਰਾਂ ਤੇ ਗੁਣ ਕੋਈ ਨਹੀਂ ਹਕਾਰੀ ਬਣੀ ਬੈਠੇ ਨੇ ਤਸਲੀਮੇ ਖੋਤੇ ਨੇ ਉਹ ਤਾਂ ਖੋਤੇ ਹੈ ਹੀ ਨਹੀਂ ਵਿਚਾਰੇ ਉਹ ਤਾਂ ਜੋਰ ਦੇ ਖੋਤੇ ਦੀ ਇਹ ਬੰਦੇ ਦੀ ਜੋ ਨਾ ਜੋ ਖੋਤਾ ਕਿੱਥੇ ਖੋਤੇ ਤਾਂ ਇਹ ਮਾਇਆ ਦੇ ਵਿੱਚ ਲੁਪਤ ਹੈ ਤਾਂ ਸਮਝੋ ਗਦਾਈ ਹੈ ਉਹ ਆਪਣੀ ਜੇ ਜੀ ਕਲਾਸ ਉਹਦੀ ਪਾਸ ਕਰੂਗਾ ਅਗਲੀ ਪੌੜੀ ਤੇ ਜਾਊਗਾ ਜਾਊਗਾ ਆਹੋ ਗਾਣਾ ਨਾ ਸਾਰੇ ਵੇਦ ਪ੍ਰਾਣ ਪੜੇਗਾ ਕਿਆ ਕੋਲ ਤੇ ਵੇਦ ਪੜ ਲੈ ਪ੍ਰਾਣ ਪੜ ਲੈ ਤਸ ਕੀ ਗੁਰ حاصل ਕੀਤਾ ਵਿੱਚ ਪੜਨ ਨੂੰ ਕਹਿੰਦੇ ਠੀਕ ਹੀ ਤਾਂ ਨਾ ਘਰ ਚੰਦਰ ਜਿਹਾ ਪਾਰਾ ਜਿਵੇਂ ਖੋਤੇ ਤੇ ਚੰਦਰ ਨਸਤਾ ਤਾਂ ਸਾਰੇ ਦਿਮਾਗ ਤੇ ਲੱਦਲੇ ਉਹ ਜੀ ਆਪ ਨਾਮ ਕੀ ਗੱਤ ਨਹੀਂ ਜਾਣੀ ਕੈਸੇ ਉੱਧਰ ਸੁਪਾਰਾ ਪਾਰਕ ਵਿੱਚ ਉਤਰ ਜੇਗਾ ਰਾਮ ਨਾਭ ਦੀ ਗੱਤ ਉਧਰ ਜਾਲੀ ਦੀ ਅੱਗੇ ਗਿਆਨ ਕਿਵੇਂ ਜਾਣੇ ਗਿਆਨ ਬਦਨ ਖੜਾ ਤੋ ਉੱਥੀ ਗਿਆਨ ਤੇਰਾ ਠੀਕ ਹੈ ਆ ਜੇ ਜੀ ਹਾਸਕੇ ਦੀ ਵੀ ਪਾ ਕੇ ਗਾ ਹੋਗੇ ਜੀ ਗੰਤਾ ਕਬੀਰ ਦੀ ਠੀਕ ਹੈ ਉਹਦਾ ਨਾਂ ਜਵਾਬ ਦੇਣਾ ਹੀ ਚੰਗੀ ਗੱਲ ਹੈ ਜਵਾਬ ਤੋਂ ਬੰਨਗੇ ਬੇਚੀ ਜ਼ਿਆਦਾ ਹੋਊਗੀ ਹਾਂਜੀ ਮਹੱਲਾ ਪੰਜਵਾਂ ਕਿਆ ਤੱਕੇ ਬੀਆ ਪਾਸ ਕਰ ਹੀੜੇ ਇੱਕ ਆਧਾਰ ਥਿਓ ਸੰਤਨ ਕੀ ਰੇਣ ਜਿਤ ਲੰਬੀ ਆ ਜਿਹੜਾ ਤੇਰੇ ਆਸ-ਪਾਸ ਹੋਰ ਕੋਚਾ ਇਹਨੂੰ ਕੀ ਦੇਖਦਾ ਬੀਆ ਉਹਦਾ ਦੂਸਰਾ ਤਕਣਾ ਦੇਖਣਾ ਕਿਆ ਤੱਕੇ ਬੀਆ ਪਾਸ ਕਹ ਰਹੇ ਹੀ ਅਨੇ ਇੱਕ ਆਧਾਰ ਉਹ ਇੱਕ ਨੂੰ ਆਧਾਰ ਬਣਾ ਲੈ ਹਿੰਦੇ ਚਾਲਾ ਦਾਲਾ ਦੀ ਦੇਖੀਦਾ ਹੁੰਦਾ ਆਲੇ ਦਾਲੇ ਮਾਇਆ ਜੇ ਧਿਆਨ ਰੱਖੀਦਾ ਹੁੰਦਾ ਟਾਰਗੇਟ ਬਣਾ ਇੱਕ ਹੋਣਾ ਦਾ ਇੱਕ ਆਧਾਰ ਬਣਾ ਕੇ ਨਾ ਇੱਕ ਹੋਣ ਕਿ ਆਯੁੱਧ ਮੈਂ ਇੱਕ ਇੱਕ ਆਇਆ ਐ ਇੱਕ ਤਾਂ ਆਇਆ ਐਜੂਗਦੇ ਵਿੱਚ ਕਿਤੜ ਮਨ ਢੋਲ ਕਰਕੇ ਕਰਨਾ ਇਹ ਮੇਰਾ ਟਾਰਗੇਟ ਹੈ ਔਰ ਸਾਰੇ ਸੰਸਾਰ ਨਾਲ ਇਕਤਾ ਕਰਦੀਆਂ ਸਾਰੇ ਸੰਸਾਰ ਨਾਲੇ ਪ੍ਰੇਮ ਕਰਨਾ ਸਾਰੇ ਸੰਸਾਰ ਨੂੰ ਪ੍ਰੇਮ ਦਾ ਉਪਦੇਸ਼ ਦੇਣੇ ਸਾਰੇ ਸੰਸਾਰ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦੀ ਅਸੀਂ ਕੋਸ਼ਿਸ਼ ਇਹ ਹੀ ਕਰਦੀ ਹਾਂ ਸਾਰੇ ਇੱਕ ਹੋ ਜਾਣ ਹਾਂਜੀ ਸਿਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਤਾਰ ਉਹ ਦੂਜੀ ਚੀਜ਼ ਤਾਂ ਸਿਰਫ ਸੰਤਾਂ ਦੀ ਰੇਣ ਹੈ ਸੰਸਾਰ ਚ ਹੋਰ ਕੁਝ ਨਹੀਂ ਤਾਂ ਉਹ ਆਪ جے دوجھی چیز دا دھیان چلنا تاں سنتاں تو رہن لے لے سنتاں دا خیال لے لے سنتاں دا اپเทศ لے لے جے دوجھی کوئی چیز دی ہے تاں دوجھی چیز سنتاں دا اپเทศ ہے سنتاں دا ਗਿਆਨ ہے سنن کی رہن لے لے جے تلبی جنوں لبدی تو کتا تار کتا تار سوکھے ہو داٹے تو ملے ہویا سوکھ او او سوکھ ہے جڑا ستور درگاہ چوں ملدا ہے ਤੱਕ ਦੀ ਰੇਣ ਜਿਹਨੂੰ ਮਿਲ ਜਾ ਦਾਤਾਲ ਤੇ ਘਰੋਂ ਉੱਥੋਂ ਫੇਟ ਜਾਂਦਾ ਦਾਤਾਲ ਦੇ ਘਰੋਂ ਮਿਲਿਆ ਹੋਇਆ ਜੋ ਸਦਾ ਸੁਖ ਹੁੰਦਾ ਜਹਾਨ ਦੇ ਵਿੱਚੋਂ ਮਿਲਿਆ ਹੋਇਆ ਜੋ ਸਦਾ ਸੁਖ ਹਲਪ ਚੁੱਕੋਂਦਾ ਸਦਾ ਸੁਖ ਨਹੀਂ ਹੁੰਦਾ ਹਾਂਜੀ ਬਿਨ ਕਰਮਾ ਹਰ ਜਿਓ ਨਾ ਪਾਈਐ ਬਿਨ ਸਤਿਗੁਰ ਮਨੁਆ ਨ ਲੱਗੈ ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂੜ ਨ ਤੱਗੈ ਕਿਰਪਾ ਤੋਂ ਬਿਨਾਂ ਹਰ ਉਹ ਜੀਵ ਦੁਆਨ ਦੀ ਪ੍ਰਾਪਤੀ ਤੋਂ ਅਸਥੀ ਖੋਜ ਨਹੀਂ ਹੋ ਸਕਦੀ। ਸ਼ਰੀਰ ਵਿੱਚ ਜੀਵ ਹੈ। ਇਹ ਤਨ ਵਿੱਚ ਮਨ ਹੈ। ਇਹਨੂੰ ਖੋਜ ਲੈਣਾ, ਇਹਨੂੰ ਥਬੀ ਲੈਣਾ। ਇਹ ਮਨ ਦੇ ਵਿੱਚ ਹਰ ਹੈ। ਤਾਂ ਉਹ ਹਲ ਭਰਕਰ ਪਹੁੰਚ ਜਾਣਾ। ਮਨ ਵਿੱਚ ਹਲ ਦਾ ਦਰਸ਼ਨ ਕਰ ਲੈਣਾ। ਕਿ ਕਰਮਣ ਮਿਲ ਨਹੀਂ ਲੱਭਦਾ। ਬੜੀ ਕਿਰਪਾ ਹੋਵੇ, ਆਪਣੀ ਇੱਛਾ ਹੋਵੇ। ਜਿੱਤ ਦੀ ਇੱਛਾ ਹੋਵੇ, ਗੁਣਤੀ ਦੀ ਇੱਛਾ ਹੋਵੇ, ਪਰ ਪਰਮੇਸ਼ਰ ਦੀ ਇੱਛਾ ਦਾ ਹਉ ਹੈ। ਇਹ ਕਰਮ ਦੇ ਇੱਕ ਪ੍ਰਕਾਰ ਦਾ ਕਰਮ ਹੋਵੇ, ਠਾਠਾ ਕੰਮ ਦੀ ਹੈ। ਇਹਨਾਂ ਪ੍ਰਕਾਰ ਦੀ ਕਿਰਪਾ ਹੋਵੇ, ਮੈਂ ਆਪਣੇ ਤੇ ਕਿਰਪਾ ਕਰੇ ਕਿ ਮੈਂ ਅੱਜ ਜੋ ਖੱਟ ਕੇ ਜਾਣਾ, ਆ ਜਨਮ ਹਾਰ ਕੇ ਨਹੀਂ ਜਾਣਾ। ਇਹ ਆਪਣੇ ਤੇ ਕਿਰਪਾ ਕਰੇ ਕਿ ਲੋਭ ਛੱਡ ਦੇਣਾ, ਹੁਣ ਛੱਡ ਦੇਣੀ ਹੈ। ਉਹ ਤਿਆਗ ਦੇਣੀ ਹੈ। ਮੈਂ ਬੜਾ ਵੀ ਕਹਣਾ ਮੈਂ ਗੁਣਤੀ ਬਣਨਾ ਜੋਣਦੀ ਮੈਨੂੰ ਇੱਛਾ ਦੀ ਮੈਨੂੰ ਬੜਾ ਡੇਰਾ ਬਣਾਉਣ ਦੀ ਇੱਛਾ ਦੀ ਮੈਂ ਛਟਕਾਰਾ ਕਰਨਾ ਮੈਂ ਦੀਵਰ ਹੋੜ ਦੀਵਾਂ 100 ਬਣ ਦੀ ਇੱਛਾ ਹੋਵੇ ਚਿੱਤਰੂ ਪਰ ਬਣੇ 100 ਬਣੇ ਉਹ 100 ਬਣੇ ਹੰਗਲ ਗੋਲਣਾ ਬਣੇ ਫਿਰ ਪਰਮੇਸ਼ਰ ਦੀ ਹੋਵੇ ਕਿਰਪਾ ਤਾਂ ਇਹ ਤੇ ਜਾ ਕੇ ਲਬਦ ਹੈ ਛਟਗੜ ਦੇ ਬਿਨਾ ਮਨੁਹਾ ਕੇ ਤੇ ਨਹੀਂ ਜੁੜ ਸਕਦਾ ਛਟਗੜ ਕੀ ਹੈ ਸੱਚ ਦੇ ਗਿਆਨ ਬਿਨਾ ਬਣ ਜੁੜੇ ਨਹੀਂ ਸਕਦਾ ਗਿਆਨ ਦਾ ਬਦਦਾ ਬਣ ਹੈ ਸੱਤਪੜ ਦਾ ਗਿਆਨ ਇਹ ਮਨ ਨੂੰ ਬੰਦ ਸਕਦਾ ਹੈ ਬੰਦ ਕੇ ਰੱਖ ਸਕਦਾ ਹੈ ਸੱਤਪੜ ਦਾ ਗਿਆਨ ਜੋ ਹੈ ਇਹੀ ਹਰ ਦੇ ਨਾਲ ਜੋੜ ਕੇ ਰੱਖਦਾ ਹੈ ਇੱਕ ਬਣਾ ਕੇ ਰੱਖਦਾ ਹੈ ਲੱਗ ਸਕਦਾ ਮਾਇਆ ਨਾਲ ਲੱਗਿਆ ਹੋਇਆ ਮਨ ਤਾਂ ਜੰਗਲ ਇਹ ਪਲ ਪਲ ਪਲ ਪਲ ਪਲ ਬਦਲਦਾ ਆਪਣੀ ਜਗਾ ਹਾਂਜੀ ਧਰਮ ਮਤੀਰਾ ਕਲ ਅੰਦਰੇ ਇਹ ਪਾਪੀ ਮੂਲ ਨਾ ਤੱਗ ਗਏ ਧਰਮ ਮਤੀਰਾ ਕਲ ਅੰਦਰੇ ਜਿੱਤੇ ਕਲ ਜੁਗਾ ਕਲਪਣਾ ਹਿਰਦੇ ਵਿੱਚ ਉੱਥੇ ਜੇ ਧਰਮ ਹੋਵੇ ਤਾਂ ਮੂਲ ਧੀਰ ਜਿਆਦਾ ਧੀਰਾ ਹੋ ਜਾਂਦਾ ਬੁੱਲਦੀ ਚਾਲ ਬਰ ਚੱਲਣਾ ਬੰਦ ਕਰ ਦਿੰਦਾ ਧੀਰ ਹੋ ਜਾਂਦਾ ਧੀਰਾ ਹੋ ਜਾਂਦਾ ਵੀ ਚਲੋ ਜੋ ਸੰਤੋਖੀ ਹੋ ਜਾਣਾ ਧੀਰਾ ਹੋਣਾ ਸੰਤੋਖੀ ਹੋ ਜਾਂਦਾ ਆਪੀ ਮੂਲ ਨਾ ਤੱਕਦਾ ਜੇ ਪਾਪੀ ਹੈ ਤਾਂ ਮੂਲ ਨਹੀਂ ਤੱਕਦਾ ਜੇ ਬਸ ਧਰਮ ਦੇ ਨਾਲ ਜੇ ਗੁਰਤੀ ਦੇ ਵਾਲਾ ਨਹੀਂ ਹੋਇਆ ਕਿਹੜੇ ਪਾਪੀ ਹੈ ਤੇ ਗੂਲਣਾ ਚੱਦਾ ਜਿ ਕਹ ਤਕਨ ਅਤਰੀ ਤਕਨ ਨਾਰੀ ਅਰਗੇ ਤੁਕ ਪਵੇ ਦਸ ਗਾੜੀ ਤੇਰੇ ਬੇਤਕਾ ਹੋ ਜਾਂਦਾ ਸਤੋਖੀ ਨਹੀਂ ਤਾਂ ਬੇਤਕਾ ਹੈ ਜਿਸ ਸਤੋਖੀ ਹੈ ਤਦ ਤਕ ਤਕਵਾਲਾ ਹਾਂਜੀ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗਾ ਇਹ ਕਰ ਇਹ ਕਰ ਪਾਏ ਜਿਹੜੇ ਹੱਥ ਨਾਲ ਬੁਰਾਈ ਕਰਦਾ ਉਸੇ ਹੱਥ ਦੀ ਸਜ਼ਾ ਪਾਲਨ ਉਹ ਉਹੀ ਪ੍ਰਾਪਤੀ ਹੋ ਜਾਂਦੀ ਹੈ ਉਸੇ ਅਰਥ ਵਿੱਚ ਉਹਦਾ ਫਲ ਪ੍ਰਾਪਤ ਹੋ ਜਾਂਦਾ ਬੁਰਾਈ ਕਰਦਾ ਬੁਰਾਈ ਦਾ ਫਲ ਮਿਲ ਜਾਂਦਾ ਹੈ ਭਲਾਈ ਕਰਦਾ ਭਲਾਈ ਦਾ ਫਲ ਮਿਲ ਜਾਂਦਾ ਸਗੇ ਆਸਣਾ ਭਲਾਈ ਕਰਦਾ ਸਗੇ ਆਤ ਫਲ ਭਲਾਈ ਦਾ ਮਿਲ ਜਾਂਦਾ ਫਲ ਕੀ ਮਿਲਦਾ ਦਰਮਲ ਹੋ ਜਾਂਦਾ ਜੇ ਮਾਲ ਕਰਕੇ ਕੋਈ ਛੇਨਾ ਕੰਮ ਕਰਦਾ ਹੈ ਉਹ ਦਰਮਲ ਹੋ ਜਾਂਦਾ ਜੇ ਕੋਈ ਬੁਰਾਈ ਕਰਦਾ ਉਹਦਾ ਦਾਸ ਬਲੀਲ ਹੋ ਜਾਂਦਾ ਜਦੇ ਠੀਕ ਹੈ ਜੀ ਇੱਕ ਖੜੀ ਮੋਤ ਨਾ ਲੱਗਿਆ ਕਿ ਕੋਈ ਨੰਬਰ ਲਿਖਾ ਨਹੀਂ ਹੈ ਬਾਤ ਛੋੜ ਵਾਲਾ ਬਾਤ ਕੋਈ ਲਿਖਾ ਨਹੀਂ ਹੋਣਾ ਹੈ ਜੋ ਕਰਦਾ ਹੈ ਰਿਜ਼ਲਟ ਜਦੇ ਆ ਜਾਂਦਾ ਇੱਕ ਖੜੀ ਮੋਤ ਵੀ ਨਹੀਂ ਲੱਗਦੀ ਕਹਿੰਦੇ ਨੇ ਲਿਖਾ ਹੋਊਗਾ ਬਾਤ ਉਹ ਸਭ ਝੂਠ ਹੈ ਕੁਛ ਵੀ ਨਾਲ ਦੀ ਨਾਲ ਜਾ ਰਿਹਾ ਹੈ ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤੀ ਅਹੰਕਾਰ ਨਾ ਭੱਗੈ ਚਾਰੇ ਯੁਗ ਸੋਧ ਕੇ ਦੇਖ ਲੈ ਮੈਂ ਅਰ ਸੰਗਤ ਸੁਕਾਰ ਨੂੰ ਪਤਾ ਹੈ ਚੰਦ ਤੇ ਬਿਰਣ ਸੁਕਾਰ ਵੀ ਉਧਰੋਂ ਜਾਂਦਾ ਜਦੋਂ ਅਜਰ ਕਿਰਤ ਅੰਤ ਇਕੱਠੇ ਨਹੀਂ ਹੁੰਦੇ ਅੰਤਰ ਜਾਂਦਾ ਹੀ ਉਧਰੋਂ ਠੀਕ ਹੈ ਜੀ ਜਿੰਨਾ ਜੇ ਇੱਕ ਜਗ੍ਹਾ ਨਹੀਂ ਹੁੰਦੇ ਨਾ ਅੰਤਰ ਅੰਦਰੋਂ ਨਹੀਂ ਜਾ ਸਕਦਾ ਕਿੰਨੇ ਚਾਹਣ ਸਾਡੇ ਅੰਦਰੋਂ ਓਮਕਾਰ ਚੱਲਾ ਜਾਵੇ ਅੰਤਰ ਚੱਲ ਜਾਊਗਾ ਕਦੇ ਬੁੱਧੀ ਅੰਕਾਰ ਵੱਲ ਹੋ ਜਾਂਦੀ ਹੈ ਕਦੇ ਮਨ ਅੰਕਾਰ ਵੱਲ ਹੋ ਜਾਂਦਾ ਕਦੇ ਜੇ ਤਾਂ ਵੱਲ ਹੋ ਜਾਂਦਾ ਜਾਵੇ ਖਾਤੇ ਘਰੇ ਪਾਟੇ ਆਵੇ ਸੂਕਾਰ ਜਨ ਭੱਜੇ ਹੋਏ ਭਾਈ ਦਾ ਜੱਤ ਨਾ ਵੀ ਰਹਿ ਹੋ ਜਾਂਦੇ ਵੀ ਇਹਨੂੰ ਘਰ ਹੀ ਰਹਿਣ ਦੇਣਾ ਇਹ ਹੁਕਮ ਦਾ ਵਿਰੋਧ ਕਰਦਾ ਹੈ ਮਾਲਕ ਦਾ ਵਿਰੋਧ ਕਰਦਾ ਹੈ ਦਾ ਵਿਰੋਧ ਕਰਦਾ ਇਹਨੂੰ ਘਰੋਂ ਕੱਢੋ ਹਮੇ ਮੂਲ ਨਾ ਛੁੱਟਈ ਬਿਨ ਸਾਧੂ ਸਤ ਸੰਗ ਮੂਲ ਨਾ ਛੁੱਟਈ ਪਹਿਲਾਂ ਤਾਂ ਹੋ ਵੀ ਨਹੀਂ ਛੁੱਟਦੀ ਹੋਰ ਬੈਦੀ ਛੁੱਟਦੀ ਹੌਣ ਛਡਾਉਣਾ ਮੈਨੂੰ ਸਾਧੂ ਸਤ ਸੰਗ ਸਾਧੂਆਂ ਕੀ ਸਤ ਸੰਗ ਬਿਨ ਹੋਇਆ ਉਹ ਸਾਧੂ ਆ ਓਦੀ ਸੰਗਤ ਕਰੇ ਤੇ ਬਿਨਾ ਉਹ ਸੰਗਤ ਕਰੇ ਤੇ ਬਿਨਾ ਉਹਦੇ ਉਪਦੇਸ਼ ਤੇ ਬਿਨਾ ਕੋਈ ਨਹੀਂ ਛੁੱਟੀ ਹੋਵੇ ਹਾਂਜੀ ਜਿੱਕਰ ਥਾ ਨਾ ਪਾਵੇ ਜਿੱਕਰ ਸਾਹਿਬ ਸਿਉ ਮਨ ਭੰਗੈ ਭੰਗੈ ਪੱਗਾ ਤੇ ਪੰਘਾ ਥਾ ਨਾ ਪਾਵੇ ਉਹਨਾਂ ਜਿਹੜੇ ਨੂੰ ਥਾਏ ਦੀ ਖਸਜੀ ਤੇ ਸਾਹਿਬ ਸਿਉ ਕੋਈ ਅਪਰੇ ਬੂਝਾ ਲੋਪਨ ਗਿਆ ਟੁੱਟਿਆ ਹੋਇਆ ਜਾਣ ਕਿ ਕਿਦ ਬੰਦ ਬੰਦ ਆ ਨਵਦਾ ਸਾਇਬਾਂ ਦਾ ਆਲ ਉਹਦੇ ਉੱਤੇ ਆਇਆ ਹੋਇਆ ਜਿਹੜੂ ਸੈਨ ਭੁੱਖੇ ਹੀ ਜਾਂਦੇ ਰਹੀ ਇੱਕਥੋਂ ਲੈ ਕੇ ਆਉਣਗੇ ਬੰਦ ਹੋ ਜੀ ਜਨ ਗੁਰਮੁਖੀ ਸੇਵਿਆ ਤਿਸ ਘਰ ਦੀ ਬਾਣ ਅਪੱਗੈ ਕਿੱਥੇ ਜਾਣਾ ਕਿਸਾ ਸ਼ਬਦ ਵਿਚਾਰ ਲਿਆ ਜਿਨੀਆਂ ਗੁਰਮਖੀ ਸੇਵਿਆ ਇਸ ਘਰ ਦੀ ਬਾਣ ਆ ਪੱਗੇ ਉਲ ਦੀ ਬਾਣ ਉਹਦੇ ਉਹਦੀ ਜੋਤ ਹੈ ਪੱਗਾ ਉਹਦੀ ਜੋਤ ਜਗੀ ਰਹੀ ਹੈ ਉਹਦਾ ਬੰਨ ਨਹੀਂ ਪੱਗ ਉਹ ਢੋਲ ਹਸਤਾ ਜਿਹ ਦੇਖੋ ਪੱਗੇ ਦੇ ਉਲਟ ਆ ਜੋ ਪੱਗ ਨਹੀਂ ਹੁੰਦਾ ਉਹ ਢੋਲ ਹਸਤਾ ਜਿਹ ਰੰਦਾ ਪੱਗ ਅਢੋਲ ਜਿੱਤਾਂ ਬੰਨ ਕੇ ਕਰਿਆ ਉਹਦਾ ਸਤੀ ਤੇ ਬੈਠ ਕੇ ਵੀ ਇੱਕ ਵਾਰ ਨਿੱਕ ਜਿੱਤਦਾ ਉਹ ਬੰਦ ਬੰਦ ਘਟਾਉਣਾ ਵੀ ਢੋਲ ਹੈ ਖੋਪਰੀ ਲੈਦੀ ਵੀ ਡੋਲ ਹੈ ਉਹ ਉਹ ਦਿਓਂ ਚ ਖੜਾ ਵੀ ਡੋਲ ਹੈ ਹਾਂਜੀ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੈ ਹਰ ਕਿਰਪਾ ਤੇ ਸੁਖ ਪਾਇਆ ਹਰ ਕਿਰਪਾ ਤੇ ਪਾਇਆ ਸੁਖ ਜੀ ਤੇ ਵੀ ਪਾਇਆ ਅਸੀਂ ਵੀ ਪਾਇਆ ਹੈ ਜਿਹਨੇ ਪਾਇਆ ਹਰ ਕਿਰਪਾ ਤੇ ਪਾਇਆ ਆਪ ਵੀ ਪਾਇਆ ਗੁਰ ਸਤਗੁਰ ਚਰਣੀ ਲੱਗੈ ਪਰ ਗੁਰ ਸਤਗੁਰ ਦੇ ਚਰਣੀ ਲੱਗ ਕੇ ਹੀ ਕਿਰਪਾ ਹੁੰਦੀ ਹੈ ਜੇ ਗੁਰ ਸਤਗੁਰ ਦੇ ਚਰਣੀ ਲੱਗੇ ਹਰ ਕਿਰਪਾ ਹੁੰਦੀ ਨਹੀਂ ਹਰ ਕਿਰਪਾ ਦੇ ਬਿਨਾ ਸੁਖ ਬਿਲਦਾ ਨਹੀਂ ਆਪਾਂ ਜਿੱਥੇ ਵੀ ਸੁਖ ਔਕਣ ਨਾਲ ਆਉਂਦਾ ਉਹ ਸੁਖ ਸਾਗਰ ਦਾ ਇਸ਼ਾਰਾ ਕਰਦਾ ਹੈ ਜੀ ਠੀਕ ਹੈ ਸੱਚਖੰਡ ਸ਼ਬਦ ਤਾਂ 21 ਵਾਰ ਵਰਤੇ ਤੇ ਸੁਖ ਸਾਗਰ ਜਿਹੜਾ ਇਹ ਬਹੁਤ ਵਾਰ ਆਇਆ ਬਾਣੀ ਚ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗਾ ਉਹ ਸਾਗਰ ਹੈ ਉਹ ਸੁਕੇ ਹੈ ਉਧਰ ਉਧਰ ਕੋਈ ਨਹੀਂ ਠੀਕ ਹੈ ਜੀ ਐਥੇ 11ਵੀਂ ਪੜੀ ਸਮਾਪਤੀ ਹੈ ਜੀ